ਦੱਖਣੇ ਮਹੱਲਾ ਪੰਜਵਾਂ ਪਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਇ ਜਨਮ ਮਰਨ ਮਰ ਸੱਚੇ ਕੇ ਗੁਣ ਗਾਏ ਹਾਂ ਪਰਭਾਤੇ ਜਦ ਤੈਨੂੰ ਪਹਿਲਾ ਗਿਆਨ ਹੁੰਦਾ ਨਾ ਪਰਭਾਤੋਂ ਦੋਤੀਏ ਸੂਰਜਾ ਜਦ ਨਿਕਲਿਆ ਦੀ ਪਰਚਾਨੋਂ ਹੋ ਜਾਂਦਾ ਰਾਤ ਬਣੀ ਰਹਿੰਦੀ ਰਾਤ ਬਣੀ ਆਉਂਦੀ ਸੂਰਜ ਬਣੀ ਨਿਕਲਿਆ ਪਰਭਾਤ ਪੁੱਤਰ ਗਿਆਨ ਹੋ ਗਿਆ ਆਪ ਪਤਾ ਲੱਗਾ ਵੀ ਆਪ ਲੋਕ ਉਲਟ ਪਾਸੇ ਜਾ ਰਹੇ ਨੇ ਇਹਨਾਂ ਗਿਆਨ ਹੋ ਗਿਆ ਪਾਵੇਂ ਪੂਰਾ ਨਾਮ ਨਹੀਂ ਹੋਇਆ ਕੋ ਪਰ ਇੰਨਾ ਜ਼ਰੂਰ ਗਿਆਨ ਹੋ ਗਿਆ ਬਿਲੇਖਾ ਖਾਦ ਲੋਕਾਂ ਸਾਰਿਆਂ ਦਾ ਹੀ ਪਰਮਾਤੇ ਜਦੋਂ ਇਹ ਜੀਵਸਤਾ ਕੀ ਪ੍ਰਭਾਤ ਵਾਲੀ ਤੇ ਜੀ ਗਿਆਨ ਹੋ ਗਿਆ ਦੁਨੀਆਂ ਮਨਬੁੱਧੀ ਤਾਂ ਉੱਚਾਕ ਚੱਲ ਪਿਆ ਅੱਗੇ ਅੱਗੇ ਵਧਣ ਦਾ ਗਿਆਨ ਵਿਰਾਕਾਰੀ ਦੁਨੀਆਂ ਦੀ ਸਮਝ ਆਉਣ ਲੱਗੀ ਫਿਰ ਨਾ ਪਜਾ ਵੰਦਨਾਵਾਂ ਜੀ ਕਿਤੇ ਇੱਥੇ ਕਿ ਮੈਂ ਤਾਂ ਗਾਹ ਦੱਸ ਦਿਆ। ਇਹੀ ਨਾਮ ਜਪਣ ਦਾ ਸਮਾਂ ਇੱਥੇ ਸ਼ਬਦ ਵਿਚਾਰਦਾ ਸਰਬੱਤੇ ਪ੍ਰਭ ਨਾਮ ਜਪ। ਇਹ ਸ਼ਬਦਾਂ ਦਾ ਜਪਣ ਦਾ ਇੱਥੇ ਸ਼ੁਰੂ ਹੁੰਦਾ। ਉਹ ਪਹਿਲਾਂ ਜਪਿਆ ਹੋਇਆ। ਤਾਂ ਪ੍ਰਭਾਤ ਵਾਸਤੇ ਹੀ ਹੁੰਦਾ। ਨਾਮ ਜਪ। ਗੁਰਤੇ ਚਰਨ ਉੱਤੇ ਆਏ। ਪਰ ਗੁਰਤੇ ਚਰਨਾਂ ਦਾ ਧਿਆਨ ਕਰ। ਗੁਰਤੇ ਚੜ੍ਹ ਕੀਨੇ? ਹਾਂ। ਗੁਣ ਗੁਣ ਧਿਆਨ ਤਾਰੇ ਸਾਰੇ ਗੁਣ ਉਹ ਜਿਹੀ ਪੈਦਾ ਹੋ ਜਾਣ। ਜਹੇ ਜੇ ਇੱਕ ਦੇ ਵਿੱਚ ਗੋਲ ਦੇ ਹੋ ਜਾ ਅਕਾਲ ਗੁਰਤ ਹੋ ਜਾ ਅਜੂਨੀ ਹੋ ਜਾ ਪਰ ਇੰਨੇ ਹੀ ਬਹੁਤ ਆ ਬਾਕੀ ਤੂੰ ਹੈਗਾ ਹੀ ਪਰ ਇਸ ਗੱਲ ਦਾ ਕਾਫੀ ਭਲੇਖਾ ਰਹਿੰਦਾ ਕਿ ਸ਼ਹਿਰ ਇਹ ਗੱਲ ਕਹੀ ਹੋਈ ਹੈ ਜਦੋਂ ਸਵੇਰੇ ਸੂਰਜ ਚੜ੍ਹਨ ਦੇ ਸਮੇਂ ਦੀ ਗੱਲ ਹੈ ਜੀ ਬਾਹਰ ਦਾ ਸੂਰਜ ਚੜ੍ਹੇ ਨਾ ਚੜ੍ਹੇ ਰੋਜ਼ ਚੜ੍ਹਦਾ ਪਰ ਬਾਹਤੇ ਕਰਦੇ ਕਿ ਬਣਿਆ ਕਿਸੇ ਨੂੰ ਉੱਧਰ ਚੱਲਣ ਹੋਇਆ ਨਹੀਂ ਪਰ ਬਾਹਰ ਵਾਲੀ ਕੀ ਕਰੇ ਬਾਹਰੀ ਸੇ ਚੜਨਾ ਤੇ ਲਿਹਿਯਾਰੀ ਰਾਤ ਉਹ ਦਿਲ ਚ ਪ੍ਰਵਾਹਤ ਹੋਵੇ ਹੋਵੇ ਫਿਰ ਗੱਲ ਬਣਦੀ ਸਮਝ ਆਉਣੀ ਆ ਵੀ ਹਾਂ ਅਰਥ ਭਾਸ਼ਾ ਫਰਕ ਕੀ ਕੁਰਬਾਨੀ ਦਾ ਅਸੀਂ ਪਾਸ਼ਾ ਸਮਝੀ ਦੀ ਤਾਂ ਕਰਕੇ ਅਰਥਾ ਤੋਂ ਅਰਥ ਹੋ ਗਏ ਇਹ ਪ੍ਰਵਾਹ ਤੇ ਤੇ ਚਾਰ ਬਾਰ ਆਉਂਦਾ ਈ ਪ੍ਰਵਾਹ ਅੱਖਰ ਗੁਰਬਾਣੀ ਚ ਤੁਝੇ ਹੀ ਮਨ ਰਾਤੇ ਐਨਸ ਪ੍ਰਵਾਹ ਹਰ ਰਸਨਾ ਜਬ ਜੇ ਪਰਵਤੇ ਉੱਲ ਆਈ ਹੈ ਪ੍ਰਭਾਤੇ ਹਾਂਜੀ ਪ੍ਰਭਾਤੇ ਪ੍ਰਭਾਤੇ ਤਾਰੇ ਖਿਸੇ ਪ੍ਰਭਾਤੇ ਤਾਰੇ ਖਿਸੇ ਅਜਿਹੇ ਛੋਟੇ ਗੁਰੂ ਦੇ ਨਾ ਇਹਨਾਂ ਦੀ ਰੋਸ਼ਨੀ ਥੱਲੇ ਲੱਗਣ ਲੱਗ ਜਾਂਦੀ ਹੈ ਸਾਰੇ ਦੀਦੀ ਪ੍ਰਭਾਤੇ ਤਾਰੇ ਖਿਸੇ ਕਿਉਂ ਹੈ ਕਿਸੇ શરી ਇਹਨਾਂ ਪਰਵਾਹ ਵਿੱਚ ਖਤਮ ਹੋ ਜਾਂਦੀ ਦੇਵੀ ਦੇ ਸਭ ਸਾਰੇ ਇੱਥੇ ਤਾਂ ਲਿਖਿਆ ਕਬੀਰ ਪ੍ਰਭਾਤੇ ਤਾਰੇ ਖਿਸੇ ਤਿਉਹੇ ਕਿਸੇ ਸਰੀਰ ਘੇਰਦਾ ਜਮਾ ਤਾਰੇ ਦੇ ਨੈਣਾਂ ਦੇ ਲੋ ਪਹੁੰਚ ਜਾਂਦੇ ਨੇ ਸਰੀਰ ਵਿੱਚ ਦੇ ਨਾ ਰੋਪੇ ਹੋ ਜਾਂਦੇ ਨੇ ਠੀਕ ਹੈ ਇਹ ਦੋ ਅਖਰ ਨਾ ਕਿਸੇ ਸੋ ਗੈ ਰਹੇ ਹੋ ਕਬੀਰ ਹਾਂ ਇਹ ਕਿਹਦੇ ਮਾਨਸਾ ਫੜੇ ਹੈ ਜੀ ਇਹਨਾਂ ਚ ਨੇ ਕੁਝ ਵੀ ਫਰਕ ਪੈਣ ਮਾਇਆ ਦਾ ਇਡੀ ਪ੍ਰਾਣੀ ਹੁੰਦੇ ਦੋਏ ਚ ਬਾਹਰੀ ਪ੍ਰਵਾਦ ਦੀ ਗੱਲ ਹੋ ਰਹੀ ਹੈ ਨਹੀਂ ਬਾਹਰ ਨਹੀਂ ਹੋ ਰਹੀ ਕੁਝ ਨਾਲ ਗੱਲ ਤਾਂ ਉਹੀ ਕਹਿੰਦਾ ਸਮਝਣ ਵਾਲੀ ਆ ਵੀ ਹੈ ਕੰਮ ਜਿਆ ਗਿਆਨ پیدا ਹੁੰਦਾ ਜਿਹੜੇ ਸਾਰੇ ਨਾ ਛੋਟੇ ਛੋਟੇ ਲੱਗਣ ਵਾਲੇ ਪਰਵਾਤ ਦੇ ਬਾਹਰ ਹੀ ਹੁੰਦਾ ਪਰ ਬਾਹਰ ਹੀ ਸਮਝਦੇ ਹਣ ਹੈ ਤਾਂ ਬਾਹਰ ਦੀ ਪ੍ਰਭਾਤ ਵੀ ਜਦ ਹੋਊਗੀ ਜਦ ਘਟ ਬੜਿਆ ਜਦ ਪਰਵਾਤ ਉਹ ਅਸੀਂ ਅੰਦਰ ਲਈ ਕਹਿੰਦੇ ਹੁਰਮਖੀ ਬੋਲੀ ਚ ਅਸੀਂ ਆਪਣੀ ਬੋਲੀ ਬਣਾਈ ਹੋਈ ਹੈ ਉਹਨਾਂ ਨੇ ਆਪਣੀ ਬਣਾਈ ਹੋਈ ਹੈ ਨਹੀਂ ਪਰ ਇਹਦਾ ਅਰਥ ਕੀ ਕਰਾਂਗੇ ਕਬੀਰ ਪਰਵਾਤ ਤੇ ਤਾਰਿਖੇ 37 ਹੇ ਪਿਓ ਨਾਲ ਲੱਗ ਗਿਆ ਨਾ ਜਿਵੇਂ ਪ੍ਰਭਾਤੇ ਤਾਰੇ ਜਿਹੜੇ ਉਹਨਾਂ ਦੀ ਬਿੰਦੂ ਬਿੰਦੂ ਨੇ ਇਹ ਵੀ ਬਿੰਦੂ ਬਿੰਦੂ ਹੁੰਦਾ ਹੁੰਦਾ ਇਹਦਾ ਜਿਹੜਾ ਦਾਰ ਹੈ ਗਾਇਬ ਸੂਰਜ ਸਮਾ ਜਾਂਦੀ ਏ ਰੋਸ਼ਨੀ ਸਾਰਿਆਂ ਦੀ ਸੂਰਜ ਹੁੰਦਾ ਤਾਰੇ ਵੀ ਉਹਦੇ ਵਿੱਚ ਦੀ ਜਿਹੜੀ ਹੁੰਦੇ ਇਹ ਦੋ ਅਖਰ ਨਾ ਕਿਸੇ ਕੀ ਮਤਲਬ ਬਣਦਾ ਫਿਰ ਤੇ ਤਰਮਨ ਜਾਣਦੇ ਕਿਤੇ ਇਕੱਠੇ ਭਾਵੇਂ ਹੋ ਜਾਂਦੇ ਨੇ ਸੋ ਗਹਿ ਰਹੇ ਕਬੀਰ ਆਹਨੇ ਡੋਏ ਫੜੇ ਹੋਏ ਜਿੱਥੇ ਕਰੇ ਰਹੇ ਹੋ ਅੱਛਾ ਜੀ ਜਾਂਦੇ ਜਥਾ ਨੇ ਐ ਰਹਿਣ ਗਿਆ ਜੀ ਹਾਂ ਜੀ ਠੀਕ ਹੈ ਜੀ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਹਾਂ ਜੀ ਸੱਚੇ ਦਾ ਗੁਣ ਗਾਇਨ ਕਰੂੰਗਾ ਜਨਮ ਦਾ ਜਿਹੜਾ ਮਰਨ ਹੋਜੂਗਾ ਸੱਚੇ ਦੇ ਗੁਣ ਕਾਉਣ ਨਾਲ ਜਨਮ ਦਾ ਜਿਹੜਾ ਹੈ ਚੱਕਰ ਇਹ ਸਭਝ ਆ ਜੂਗੀ ਇਹਦੀ ਜਿਹੜੀ ਪਰਵੇ ਦੂਰ ਹੋ ਜੂਗਾ ਨਾਲ ਉਤਰ ਜੂਗੀ ਠੀਕ ਹੈ ਜੀ ਪਰਬਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਇ ਜਨਮ ਮਰਨ ਮਲ ਉਤਰ ਸੱਚੇ ਕੇ ਗੁਣ ਗਾਹੀ ਹਾਂ ਜੀ ਸੱਚੇ ਦੇ ਗੁਣ ਗਾਉਣ ਨਾਲ ਜਨਮ ਮਰਨ ਦੀ ਮਲ ਉਤਰੇਗੀ ਉਸ ਦੇਗੋ ਤੇਜਲ ਬਰਦੀ ਬਰਤੋ ਹੋਜੀ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਦ ਸੁਣਨੀ ਨਾਮ ਵੀ ਹੋਣੀਆ ਨਾਨਕ ਸਫਲ ਜਨਮ है ਕਟੁੱਟਾ ਸਚ ਤਣੀ ਜਿਹੜੀ ਦੇਹੀ है, ਅੰਧਲੀ ਅਧਾਰੀ ਹੈ ਤੇ ਗੁਪਤ ਤੇ ਅਧਾਰੀ ਅੰਧ ਸੁਜੀ ਅੰਧੀ ਵੀ ਹੈ ਸੁਜੀ ਵੀ ਖਾਲੀ ਹੈ ਰੋਸ਼ਨੀ ਨਹੀਂ ਨਾਬਿਹੂੜੀਆਂ ਨਾ ਬਿਹੂੜੀਆਂ ਦੀ ਜੜੀ ਨਹੀਂ ਹੁੰਦੀ ਆ ਅੰਦਰ ਖਾਲੀ ਹੁੰਦੀ ਆ ਸੁਜੀ ਜਿਹਦੇ ਨਾਲ ਦੀ ਜਿਹੜੀ ਅਸੀਂ ਜੀ ਜੇ ਐਸੀ ਦੇ ਤਾਂ ਨਾਬਿਹੂੜੀ ਹੁੰਦੀ ਆ ਤੇ ਆਧਾਰੀ ਅੰਧ ਸੁਜੀ ਤੇਰੇ ਜੇ ਖਾਣਾ ਹੋਵੇ ਵੀ ਨਹੀਂ ਹਟਾ ਕੜਾ ਸੁਜੀ ਖਾਲੀ ਜੇ ਘਰ ਕਾਉ ਨਾਬਿਹੂੜੀ ਕਿਉਂਕਿ ਨਾਬਿਹੂੜੀ ਹੈ ਦੋਬਟਾ ਹੈ ਦਿੱਤ ਅચ્છਾ ਕਿਤੇ ਐ ਤਾਂ ਨਹੀਂ ਦੇ ਅੰਧਾਰੀ ਅੰਧ ਨਾਮ ਆਨੇ ਕੋਈ ਗੱਲ ਆ ਜਾਣੀ ਆ ਕਰਾਂਗੇ ਉੱਥੇ ਆ ਜਾਣਗੇ ਆ ਨਾ ਬਨੂੜੀਆਂ ਦੀ ਦੇਹ ਇਹ ਜੀ ਹੁੰਦੀ ਹੈ ਨਾ ਸੁੰਨੀ ਹੁੰਦੀ ਹੈ ਜੀ ਤਾਨਕ ਸਫਲ ਜਨਮ ਜੈ ਘਟ ਬੁੱਠਾ ਸਚ ਤਣੀ ਖਾਂਦੇ ਕਹਿੰਦਾ ਉਹਦਾ ਜਨਮ ਸਫਲ ਹੈ ਕਿਤੇ ਜਹਦੇ ਵਿੱਚ ਆਪ ਸੱਚ ਵਰਤ ਗਿਆ ਵਰਤ ਗਿਆ ਵਰਤ ਗਿਆ ਜਿਹਦੇ ਸਬਦ ਗੁਰੂ ਪ੍ਰਗਟ ਹੋ ਗਿਆ ਜੇ ਬੁੱਠਾ ਜਿੱਤੇ ਸਹਿਬ ਲਾਇਆ ਉਹ ਕਹਿੰਦੇ ਸੱਚ ਲਈ ਕਿਸੇ ਦੇ ਦਰਬਾਰਤ ਗਿਆ ਉਹਦਾ ਜਨਮ ਸਫਲਾ ਠੀਕ ਹੈ ਜੀ ਮਹੱਲਾ ਪੰਜਵਾਂ ਲੋਇਣ ਲੋਈ ਡਿਠ ਪਿਆਸ ਨਾ ਬੁੱਜੈ ਮੂਖਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਰੀ ਲੋਇਣ ਲੋਈ ਡਿਠ ਆਇ ਖਾਨੜ ਦੇਖਿਆ ਮੈਂ ਪਿਆਸ ਨਾ ਬੁੱਜੈ ਮੂਖੜੀ ਮੇਰੀ ਅੰਦੀ ਪਿਆਸ ਹੈ ਬੁੱਝਦੀ ਨਹੀਂ ਪਿਆਸ ਨਹੀਂ ਪੂਰੀ ਦੇਖ ਰਹੀ ਜੋ ਲੋਹਣ ਅੱਖਾਂ ਨਾਲ ਅਦਲੀ ਅੱਖ ਦੀ ਗੱਲ ਹੈ ਕਿ ਪਿਆਰ ਜਿਆਦਾ ਅਜੁਰਦੀ ਉਹ ਪਰ ਨਾਲ ਇਹ ਵੀ ਦੱਸਦਾ ਆਖਾਂ ਬਾਲੀ ਦੀ ਨਾਨクセ ਅੱਖੀਆਂ ਬੰਦ ਉਹ ਕਾ ਹੋਰਦੇ ਜਿਹਨਾਂ ਦੀ ਗੱਲ ਕਰਦਾ ਦਸੰਦ ਦੀ ਜਿਹਨਾਂ ਨਾਲ ਮੈਂ ਆਪਣਾ ਦੇਖਿਆ ਹੈ ਨਾਲ ਮੈਨੂੰ ਆਪਣਾ ਪਤੀ ਦਿੱਸ ਰਿਹਾ ਉਹ ਕਾ ਹੋਰਦੇ ਬਾਲੀ ਦੀ ਗੱਲ ਇਹਦਾ ਪਾਵ ਜਿੱਥੇ ਲੋਇਣ ਦੀ ਗੱਲ ਆਏਗੀ ਆਪਾਂ ਨੂੰ ਬਹੁਤ ਸਾਵਧਾਨ ਹੋ ਕੇ ਅਰਥ ਕਰਨੇ ਪੈਣਗੇ ਹਾਂਜੀ ਹਾਂਜੀ ਆਪਾਂ ਲੋਇਨ ਦੇ ਅਰਥਾਂ ਬਾਹਰਲੀ ਅੱਖਾਂ ਹੀ ਕਰਦੇ ਆਂ ਤੇ ਏਥੇ ਪੰਜਵੀਂ ਆਪਣੇ ਪਿਰ ਨੂੰ ਜਿਹੜਾ ਲੋੜ ਵਿਰਾਪਤੀ ਨੂੰ ਦਿਖ ਰਿਹਾ ਉਹ ਹੋ ਗਈ ਹਾਂਜੀ ਬੁੱਧੀ ਹੈ ਜਿਨਾ ਦਿਸੰਦੂ ਮਾਂ ਮਾਂ ਕੌਣ ਇਹ ਮਨ ਕਹਿ ਰਿਹਾ ਜੀ ਬਾ ਬਾ ਅੱਛਾ ਜਿਨਾ ਦਿਸੰਦੂ ਮਾਂ ਪੀਰੀ ਮੇਰਾ ਆਪਣਾ ਪਿਰ ਹਾਂ ਜੀ ਠੀਕ ਹੈ ਇਹ ਲਹਿੰਦੀ ਬੋਲੀ ਹੈ ਜੀ ਹਾਂ ਜੀ ਕੌੜੀ ਜਿਨ ਤਿੰਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ ਜੇ ਜੇਦੀ ਗੁਰੂਕ ਸੇਵਾ ਗੁਰੂਕੀ ਸੇਵਾ ਜਿਹੜੇ ਗੁਰਮਖਾnde ਜਾਣਕਾਰਾਂ ਦੇ ਗਿਆਨਵਾਨ ਜਨਤਾ ਉਹਨਾਂ ਦੇ ਜਾਣਕਾਰ ਗਿਆਨਵਾਨ ਗੁਰਮਖਾnde ਇਹ ਵਲੇ ਹੱਥੇ ਰਕ ਲਈ ਸ਼ਬਦ ਦੀ ਕਮਾਈ ਸਮਝ ਲਈ ਗੁਰਕੀ ਸੇਵਾ ਸ਼ਬਦ ਵਿਚਾਰ ਕਰ ਲਈ ਉਹਨਾਂ ਨੂੰ ਸਾਰੇ ਸੁੱਖ ਮਿਲ ਗਏ ਸਭ ਸੁੱਖ ਪਾਈ ਸਾਰੇ ਸੁੱਖ ਉਹਨਾਂ ਨਾਲ ਬਣ ਸਕੀ ਹੋਵੇ ਉਹ ਆਪ ਤਰਿਆ ਕੋਟਾਂਦ ਸਿਉ ਆਪ ਤਰਿਆ ਕੋਟਾਂਦ ਸਿਉ ਕੋਟਾਂਦ ਕੀ ਜਿਵੇਂ ਉਪਰ ਸਿੱਖਾਂ ਜੁੜੇ ਹੋਏ ਗੁਰਮਤਨਾਂ ਡਾਇਰੈਕਟਰ ਜਾਇ ਹੋ ਪਕਤ ਨਹੀਂ ਚਾਇ ਸਾਰੀ ਦੇ ਉਹ ਇੱਕ ਕਟੰਬ ਜੇ ਸਲਾਮ ਵਾਲਿਆਂ ਦਾ ਤੁਖਬਾ ਉਹ ਵੀ ਆ ਕੇ ਤਰ ਸਕਦੇ ਨੇ ਸਾਡੇ ਲੋਕ ਇਸਾਈ ਆ ਜਾਣ ਦੂਜੇ ਕਟੰਬ ਦੇ ਉਹ ਵੀ ਕਰ ਸਕਦੇ ਜਿੱਤ ਦੁਆਰੇ ਉੱਗਲੇ ਤੇ ਲਈ ਹੋਆ ਜਾਣ ਉਹ ਵੀ ਕਰ ਸਕਦੇ ਇੱਥੇ ਆ ਦੋ ਪਸਾਲ ਤੋਂ ਕੋਈ ਹੋਣ ਦੋ ਗੁਰਮਤਿ ਮਿਲਣ ਦੇ ਉਹ ਆਪਣੇ ਕਟੰਬ ਨਾਲ ਕਰਿਆ ਸਭ ਜਗਤ ਤਰਾਈ ਸਾਰਾ ਸੁਧਾਰ ਵੀ ਤਾਰਤਾ ਦੂਜੇ ਕਟੰਬੀ ਤਾਰਤੇ ਜੁਗਤਲ ਵਿੱਚ ਉਹਨਾਂ ਦੂਜੇ ਕਟੰਬ ਜ਼ਾਲਮੀ ਬਿਲਕੁਲ ਸਾਰੇ ਵੈਲਕਪ ਦੇ ਆ ਜੋ ਤਿਖਾ 부ਝਾਈ ਹੁਣ ਛੱਡੇ ਲਾਲਜ ਦੁਨੀ ਕੇ ਅੰਤਰ ਲਿਵ ਲਾਈ ਉਹ ਜਿਹੜਾ ਬੰਦਾ ਜਿਹਦੇ ਉੱਪਰ ਜਗਤ ਚੱਲਿਆ ਗੁਰਬਖਸ਼ ਜਿਹਦੇ ਛੇਰੇ ਹਰ ਨਾਮ ਦਾ ਸੱਚਿਆ ਉਹਨਾਂ ਹਲਨਾਮ ਦਾ ਨਹੀਂ ਸਖਾ ਕੀਤਾ ਜਦੋਂ ਕੀਤਾ ਸਮਝਿਆ ਸਭ ਤਖਾਬ ਜਾਈ ਉਹਦੇ ਆਪਣੀ ਤਖਾਬ ਸੱਲੀ ਸਭ ਜਾਈ ਦੁਨੀਆਂ ਦਾ ਜਣਾ ਕੋਈ ਵੀ ਤਨ ਭਾਇਆ ਦੀ ਕੋਖ ਰਹੀ ਨਹੀਂ ਉਹਦੇ ਉੱਤੇ ਉਹਦੀ ਛੱਡੇ ਲਾਲੇ ਦੁਨੀ ਕੇ ਦੁਨੀ ਦੇ ਸਾਰੇ ਲਾਲਚ ਦੁਨੀ ਦੇ ਲਾਲਚ ਕੀਤ ਦੁਨੀਆ ਦੀਆਂ ਬੜਾਈਆਂ ਵੀ ਲਾਲਚ ਸੰਸਾਰ ਦੇ ਬਹੁਤ ਸਾਰੇ ਲਾਲਚ ਸਾਰੇ ਛੱਟੇ ਦੁਨੀ ਕੈ ਉੱਤਰ ਲੈ ਬਲਾਈ ਆਪਣੇ ਅੰਦਰ ਹੀ ਜੁੜਿਆ ਰਹਿੰਦਾ ਜੇ ਬੋਲਦਾ ਵੀ ਤਾਂ ਆਪਣੇ ਅੰਦਰ ਜੁੜ ਕੇ ਹੀ ਬੋਲਦਾ ਉਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਉਹਨੂੰ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ ਉਸ ਸਦਾ ਸਦਾ ਕਰ ਆਨੰਦ ਹੈ ਉਹਦੇ ਤਾਂ ਸਦਾ ਹੀ ਆਨੰਦ ਬਣਿਆ ਰਹਿੰਦਾ ਉਹ ਗਰੋਸ ਕਰਾ ਦੇਣੀ ਹੁੰਦਾ ਵੀ ਲੱਗਦਾ ਹੀ ਜੇ ਉਹ ਬੋਲਦਾ ਕੋਈ ਗੁੱਥੇ-ਗੁੱਥੇ ਨਾਲੇ ਹੋਰ ਉਹ ਗੱਲ ਹੋਰ ਹੁੰਦੀ ਐ ਹੋਰ ਬੂੜ ਦੀ ਗੱਲ ਕਰਦਾ ਹੁੰਦਾ ਉਹਨਾਂ ਨੂੰ ਲੱਗਦਾ ਖਾਂਜੀ ਗੁੱਸਾ ਕਰਦਾ ਖਾਂਜੀ ਕੀ ਕਰਦਾ ਦੋੜ ਵਾਲੇ ਨੂੰ ਕੁਝ ਹੋਰ ਲੱਗਦਾ ਨਹੀਂ ਹੁੰਦਾ ਐਸਾ ਨਹੀਂ ਹੁੰਦਾ ਸਦਾ ਸਦਾ ਘਰ ਫਿਰਦਾ ਹੈ ਉਹਦੇ ਹਰ ਸਗਾ ਸਹਾਈ ਹਰੇ ਸਗਾ ਉਹਦਾ ਹਰੇ ਸਹਾਰਾ ਤਾਂ ਸਭ ਦੇ ਅੰਦਰ ਹੈ ਹਰ ਸਭ ਦੇ ਅੰਦਰ ਉਹ ਹਰ ਨੂੰ ਸੰਬੋਧਨ ਕਰਕੇ ਬੋਲਦਾ ਹਰ ਦੀ ਅਗਿਆਚ ਰਹਿੰਦਾ ਅਸਲ ਨੇ ਵਿਟੜੇ ਹਰ ਦੀ ਦੇ ਵਿੱਚ ਨਹੀਂ ਉਹਨਾਂ ਨੂੰ ਲੱਗਦਾ ਵੀ ਬੁਰਾ ਭਲਾ ਸਾਡੂ ਕਹਿਣਾ ਜੇ ਬੋਲਦਾ ਉਹਨਾਂ ਨੂੰ ਤਾਂ ਉਹਨਾਂ ਦੇ ਹੱਰ ਵੱਲੋਂ ਬੋਲਦਾ ਆਪਣੇ ਉੱਤੇ ਦੇਖਣੋਂ ਵੀ ਹੱਥ ੋਟਾ ਵੀ ਤਾਂ ਇਹ ਗੱਲ ਕਹਿੰਦਾ ਮੰਨਦਾ ਉਹਦੀ ਵੈਰੀ ਬਿੱਤਰ ਸਭੂ ਕੀਤੇ ਆ ਦੇਖੋ ਇੱਥੇ ਅੱਗ ਕੀ ਹੈ ਇੱਥੇ ਉਹ ਵੀ ਬਗਿਆ ਹੋਇਆ ਹੈ ਐਂ ਹੀ ਵੱਡਾ ਉਹ ਉਹਦੀ ਵੈਰੀ ਉਹਨੂੰ ਬਰਾਬਰ ਸਮਝਣਾ ਪਊਗਾ ਉਹਦੀ ਵੈਰੀ ਸਮਝਦਾ ਤੁਸੀਂ ਸਮਝੀ ਜਾਓ ਵੈਰੀ ਜੇ ਤੁਸੀਂ ਕਰਦੇ ਰਹੋ ਵੈਰ ਕੀ ਬਗਾਲ ਲਓਗੇ ਪੈਰ ਕਰਕੇ ਨਹੀਂ ਬਗੜਦਾ ਕਿਸੇ ਦਾ ਕੁਝ ਵੈਰ ਕੀਤੇ ਆਪਣਾ ਹੀ ਬਗੜਦਾ ਜੇ ਪੈਰ ਕਰੋਗੇ ਗੁਰੂ ਘਰ ਦਾ ਕੁਝ ਨਹੀਂ ਵਿਗੜਿਆ ਲੋਕ ਵੈਰ ਕਰਦੇ ਰਹੇ ਕਿ ਵਿੜਿਆ ਕੌਣ ਦਾ ਵਿਗੜਿਆ ਗੁਰਬਖਸ਼ ਨਹੀਂ ਵੈਰ ਕਰ ਸਕਦਾ ਕਿਸੇ ਨਾਲ ਦੀ ਮਜਬੂਰੀ ਹੈ ਉਹਦੀ ਵੈਰੀ ਮਿੱਤਰ ਸਭ ਕੀਤੇ ਵੈਰੀ ਮਿੱਤਰ ਉਹਦੇ ਸਮਾਨ ਨੇ ਸਭ ਨਾਲ ਸਿਪਾਈ ਸਾਰਿਆਂ ਦੇ ਨਾਲ ਸਵਾਲ ਆਉਂਦਾ ਗੱਲ ਜਿਹੜੀ ਕਰਦਾ ਅੰਦਰੋਂ ਤਾਂ ਸਾਰੇ ਹੀ ਬੰਦੇ ਨੇ ਬਾਹਰੋਂ ਜਾਇ ਕੋਈ ਟੰਡੇ ਹੁਣ ਸਾਰਿਆਂ ਨੇ ਸਿਪਾਈ ਦਾ ਮਤਲਬ ਇੱਕ ਹੋਰ ਹੁੰਦਾ ਉਹਦੇ ਅੰਦਰ ਸਾਰਿਆਂ ਦਾ ਸੱਚੇ ਸ਼ੁਭ ਭਾਵ ਨੇ ਸਾਰੇ ਤਰਜਨ ਭੌਸਾ ਸੱਚੇ ਡੁੱਬੇ ਨਾ ਕੋਈ ਇਹਦੇ ਅੰਦਰ ਸਾਰਿਆਂ ਵਾਸਤੇ ਇੱਕ ਭਾਵ ਦੇ ਪੈਰੀ ਪੁੱਤਰ ਵੈਰੀ ਜਿਹੜਾ ਮਨਸੀ ਉਹਨੂੰ ਮਿੱਤਰ ਬਣਾ ਕੇ ਸਮ ਕਰ ਲਿਆ ਐ ਨਹੀਂ ਹੈ ਗੱਲ ਨਹੀਂ ਸੰਸਾਰ ਦੇ ਵਿੱਚ ਗੁਰਮੁਖ ਜਿਹੜੇ ਹੁੰਦੇ ਨੇ ਮਿੱਤਰ ਪਹਿਲਾਂ ਹੀ ਹੁੰਦੇ ਨੇ ਜੋ ਆਪ ਬਜ਼ੈਰੀ ਸੁਬੀਤ ਆਮਾਰਾ ਜੋ ਆਪ ਬਜ਼ੈਰੀ ਹੈ ਜਿਹੜੇ ਵੀ ਮਾਰੇ ਨਹੀਂ ਐ ਮਦਦ ਕਰੇ ਉਹ ਵੀ ਸਾਡੇ ਬਿੱਤਰਾਂ ਸਮਾਨ ਨੇ ਉਹਨੂੰ ਸਮਝਾਜੋ ਰਾਜ ਅਸਰ ਪਿਆਈਦਾ ਹੁੰਦਾ ਉਹਨੂੰ ਸਮਝਾਈਦਾ ਹੁੰਦਾ ਜਿਹੜਾ ਭਲਾ ਕਰੀਦਾ ਹੁੰਦਾ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰਨ ਦੇ ਜਨ ਹੁਕਮ ਜਿਹੜਾ ਸਾਡਾ ਭਲਾ ਕਰਦਾ ਸਾਡਾ ਬਿੱਤਰ ਹੈ ਜੇ ਟੀਚਰ ਘੂਰਦਾ ਉਹਨੂੰ ਪੜਾ ਰਿਹਾ ਉਹ 12 ਪਾਸ ਹੋ ਕੇ ਚਿੰਦੇ ਨੂੰ ਬਣਾ ਪੋਸਟ ਤੇ ਜਾ ਕੇ ਅਫਸਰ ਬਣੇ ਉਹ ਬਹਿਰੀਆ ਟੀਚਰ ਬਿੱਤਰ ਹੈ ਉਹ ਤਾਂ ਸਭੀ ਨੂੰ ਫਰਕ ਠੀਕ ਹੈ ਜੀ ਸਭ ਨਾਲ ਸੁਭਾਈ ਸਭਨਾਂ ਦੇ ਇਹ ਸ਼ੁਭ ਕਾਮਨਾਵਾਂ ਮੰਗਦਾ ਹਾਂ ਜੀ ਸਰਬੱਤ ਦਾ ਭਲਾ ਲੋਕ ਦਾ ਠੀਕ ਹੈ ਹੋਆ ਉਹੀ ਅੱਲ ਜੱਗ ਮੈਂ ਗੁਰ ਗਿਆਨ ਜਪਾਈ ਪੁਰਬ ਲਿਖਿਆ ਪਾਇਆ ਹਰਿ ਸਿਓ ਬਣਾਈ ਵਾ ਉਹੀ ਅੱਲ ਜੱਗ ਮੈਂ ਦੇ ਵਿੱਚ ਅਲੋ ਦਾ ਜਿਹੜਾ ਤਾਜ਼ਾ ਹੁੰਦਾ ਕੋਈ ਜਿਹਨੂੰ ਆਪਾਂ ਕੱਚਾ ਵੀ ਕਹਿ ਦਿੰਦੇ ਹਾਂ ਅਜਬ ਉਹ ਤਾਂ ਬਹੁਤ ਕੱਚਾ ਹੁੰਦਾ ਜਾਂ ਪੈਦਾ ਹੁੰਦਾ ਅੱਲਾ ਉਸ ਦਾ ਬੋਲਣ ਟੁਪਿਕਾ ਅਲਾਇਤੋ ਵੀ ਅਲ ਬਣੇ ਉਹਦਾ ਹੀ ਅਨੁਭਵ ਹੋਇਆ ਉਹੀ ਫੁੱਗਰਿਆ ਫੁੱਗਰਿਆ ਕਹਿ ਸਕਦੇ ਆਪਾਂ ਸੁਰਸਾਰ ਕੇ ਉਹੀ ਫੁੱਗਰਿਆ ਉਹਦੇ ਅੰਦਰ ਗਿਆਨ ਫੁੱਗਰਿਆ ਜਗ ਮੈਂ ਗਿਆਨ ਜਿਪਾਈ ਜਿਹਨੂੰ ਸੰਤ ਕੋਲ ਦੇ ਗਿਆਨ ਜਿਪਾਤਾ ਸੁਭਝਾਤਾ ਉਹਦੇ ਅੰਦਰ ਉਹ ਗਿਆਨ ਫੁੱਗਰਿਆ ਜੀਤੇ ਗੁਰਬਾਣੀ ਨੂੰ ਪਹਿਲਾਂ ਡੀਪਲੀ ਸਟਡੀ ਕਰ ਲਿਆ ਸਮਝ ਲਿਆ ਪਚਾਲ ਲਿਆ ਬੰਨ ਲਿਆ ਉਹਦੇ ਅਸਰੰਗਾਰ ਪਹਿਲਾ ਉਹਨੇ ਨਾਮ ਦੱਬਾ ਨਾ ਨਹੀਂ ਹੁੰਦਾ ਪੂਰ ਲਿਖਿਆ ਪਾਇਆ ਖਰਚੂ ਬਣਾਈ ਉਹਨੇ ਪੂਰਵਜੋ ਚੱਲਿਆ ਸੀ ਜਦ ਫਿੱਟਰ ਹੋਇਆ ਸੀ ਸਿੱਖੀ ਚ ਉਹ ਜਿਹੜਾ ਬੁੰਦਿਆ ਸੀ ਅੰਦਰ ਲਿਖਿਆ ਸੀ ਉਹ ਟਾਰਗੇਟ ਉਹਨੇ ਪ੍ਰਾਪਤ ਕਰ ਲਿਆ ਪੂਰ ਕੋੜਾ ਲਿਖਿਆ ਟਾਰਗੇਟ ਪ੍ਰਾਪਤ ਹੋ ਗਿਆ ਖਰਚੂ ਬਣਾਈ ਹਰ ਉਹਦੀ ਸਭ ਇੱਕ ਹੋ ਗਿਆ ਹਰਦੈ ਗੋਪਾਲੀ ਚੱਲਦਾ ਕੋਈ ਹਰਦੇ ਸਾਬੋ ਸ਼ਿਕਾਇਤ ਕਦੇ ਪੈਦਾ ਹੁੰਦੀ ਹੀ ਨਹੀਂ ਤੇ ਪਾਣੀ ਤੇ ਚੱਲਦਾ ਖੁਸ਼ੀ ਖੁਸ਼ੀ ਚੱਲਦਾ ਠੀਕ ਹੈ ਜੀ ਇੱਥੇ 16ਵੀਂ ਪਾੜਵੀ ਸਮਾਪਤੀ ਹੈ ਜੀ